ਜੋ ਭਈ ਦੇ ਛਤਰ ਨੀ ਰਹੈ ਬੁੱਧਮਤੀ ਜਾ ਕੋ ਜਗ ਕਹੈ ਜਾ ਤਨ ਤਾਏ ਮਿਰਦਤਾ ਐਸੇ ਤਾ ਤਨੇ ਇਹ ਚਰਿੱਤਰ ਬਨਾਇਸ ਦਵੈ ਸੰਦੂਖ ਜੂਤੀਆਂ ਨ ਪਰੇ ਮੋਹਨ ਕੇ ਕੁਲ ਸੁਨ ਤੂ ਚਰੇ ਪੁੱਤਰ ਪੋਤਰ ਤਾ ਦਿਨ ਤੇ ਤਾ ਕੇ ਉਦਦ ਪੈ ਸੇਵਾ ਕਹਵਾ ਕੇ ਦੋਹਰਾ ਜੋ ਕਜ ਕਹੈ ਪ੍ਰਿਯ ਮਾਨ ਹੀ ਸੇਵਾ ਕਰੈ ਆਇਸ ਮੈਂ ਸਭ ਹੀ ਚੱਲੈ ਲਲਚਾਏ ਚੌਬਈ ਜੋ ਆਗਿਆ ਤਰੀ ਕਰੈ ਸੋ ਮਾਨੈ ਜੂਤਨ ਕੋ ਮੋਹ ਰ ਆਜ ਕਾਲ ਬੁੱਢੀਆ ਮਰਜੈ ਹੈ ਸਭ ਹੀ ਦਰਬਹ ਮਾਰੋ ਹੈ ਜਬ ਤੇ ਨਿਗਟ ਕੁਟੰਬ ਸੁਭਾਵੈ ਤਹਾ ਬੁੱਢੀਆ ਯੋ ਬਚਨ ਸੁਨਾਵੈ ਜੀਅਤ ਲਗੇ ਇਹ ਦਰਬਹ ਮਾਰੋ ਬੌਰ ਲੀਦਿਓ ਪੂਤ ਦਿਹਾਰੋ ਜਬੋ ਤ੍ਰਿਆ ਰੋਗਨੀ ਪਈ ਕਾਜੀ ਕੁਟਵਾਰਿਆ ਕਹਿ ਗਈ ਕਰਮ ਧਰਮ ਜੋ ਪ੍ਰਥਮ ਕਰੈ ਹੈ ਸੋ ਸੁਤ ਬੌਰਖ ਜਾਨੂ ਰਹਿ ਹੈ ਦੋਹਰਾ ਕਰਮ ਧਰਮ ਸੁਤ ਜਬ ਲਗੇ ਕਰੈ ਨਾ ਪ੍ਰਥਮ ਬਨਾਏ ਤਾਵ ਲੋ ਸੁਤਨ ਨਾ ਦੀਦਿਓ ਹਮਰੋ ਦਰਬ ਕੇ ਹਰ ਦਿਨ ਖੁਸ਼ਾਲੀ ਭਈ ਕਰਮ ਧਰਮ ਜੋ ਪ੍ਰਥਮ ਕਰੈ ਹੈ ਪੁਨ ਏ ਬਾਟਖ ਜਾਨੂ ਲੈ ਹੈ ਦੋਹਰਾ ਕਰਮ ਧਰਮ ਤਾਕੇ ਕਰੈ ਆਤਿ ਧਨ ਸੁਤਨ ਲਗਾਏ ਬਹੁ ਸੰਧੂਗ ਪੰਨੀਨ ਛੋਰਤ ਭੇ ਮਿਲ ਆਏ ਚਾਉ ਬਈ ਇਤ ਚਿਤ੍ਰ ਸੇਵ ਕਰਾਈ ਸੁਤੰਦਰਵ ਕੋ ਲੋਭ ਦਿਖਾਈ ਤਿਨ ਕੇ ਅੰਤ ਨ ਕਛ ਕਰ ਆਇਓ ਛਲ ਬਲ ਆਪਣੋ ਮੂਡ ਮੁੰਡਾ ਆਇਓ ਇਤ ਸ੍ਰੀ ਚਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸਮਾਪਤ ਮਸਤ ਸੁਭ ਮਸਤੇ ਅਪਜੂ ਦੋਹਰਾ ਮਾਲਨੇਰ ਕੇ ਦੇਸ ਮੈਂ ਮਰਗਜਪੁਰ ਇਕ ਗਾਓ ਸ਼ਾਹ ਏਕ ਤੇ ਠਾਂ ਬਸਤ ਮਦਨ ਸ਼ਹਾ ਤੇ ਨਾਉ मदन मती ता कीत्रिया जाको रूप अपार आम मदन ठटके रहै तेहि रात रूप विचार चेला राम तहां तो एक शाह को पूत सकल गुणन पीतर चतुर सुन्दर मदन स्वरूप चौबई चेला राम जवै त्रि लह्यो ताको तवै मदन तन गहो करन तरन तेरा हाथ लुभाई निरख सज्जन छब रही बिकाई अड़ेल दूती पठाए ताए ग्रह बोल पठायो कांपो ता सब बहु भांति कमायो सोए शाह जब जाए ताहे बुलावे हो ताहे भए रस रीत प्रीत उपजावी जावे तरनी तरमी उठ शाह हो जाग्यो पूछन ता आप जव लाग्यो जात दी कह तरण बतावो हमरे चित को परम मिटावो सुनो शाह मैं वचन उचारो तुमरे चित्त को भरमो उतारो मोहू टूट कै जब गई ले तवै पसवारन भई दोहरा ऐस निसा कर शाह की दीनो बौर सवाए तुरत मीत पै चल गई यार पजी लपटाए इत श्री चित्रपघ्याने त्रया चित्र रे भूप ਦੋਹਰਾ ਦੇਸਭਾਵਨੀ ਕੇ ਰਹੈ ਮਾਲਵ ਨਾਮ ਗਵਾਰ ਮੈਨ ਕਲਾਤਾ ਕੀ ਤਰਨ ਜਾ ਕੋ ਰੂਪ ਆਪਾਰ ਦੀਰਘ ਦੇਹਤਾ ਕੋ ਰਹੈ ਪੁਸ਼ਟ ਸਭ ਠੌਰ ਦੀਰਘ ਪੁਸ਼ਟਤਾ ਤਰਨ ਦੁਤੀਏ ਨਾ ਜਾਗ ਮੈਂ ਔਰ ਅੜਿਲ ਹੌਜਦਾਰ ਇੱਕ ਗਾਉ ਤਵਨ ਕੇ ਆਇਓ ਪਿਆਸ ਘਾਮ ਤੇ ਅਜਕ ਤਵਨ ਦੁਖ ਪਾਇਓ ਪਾਣੀ ਚਹਿਓ ਜਟਿਆ ਤਿੰਨ ਦਿਓ ਠਾਇ ਕਹਿਓ ਨਿਰਖ ਤਵਨ ਕੋ ਰੂਪ ਰਹੋ ਰਿਝਾਇ ਕਹਿ ਚਿਤ ਮੈਂ ਕੀਆ ਵਿਚਾਰ ਜੋ ਯਾਕੋ ਪਾਈਐ ਏਕ ਪੁੱਤਰ ਜਾਤੇ ਭਜ ਕਾ ਉਪਜਾਈਐ ਅਧਿਕ ਬਲੀ ਸੋ ਹੋਵੈ ਸਭ ਜਗ ਜਾਣੀਐ ਹੋ ਤਾ ਕੇ ਢੀਲ ਸਮਾਨ ਨਾ ਔਰ ਬਖਾਨੀਐ ਦੋਰਾ ਫੌਜਦਾਰ ਇੱਕ ਸਾਧਰੀ ਤਾ ਕੇ ਤਈ ਪਠਾਏ ਨਿਸਾ ਕਰੀ ਧਨ ਦੇ ਕਨੋ ਭੇਦ ਸਕਲ ਸਮਝਾਏ ਅੜਿਲ ਸੁੰਤ ਸਾਧਰੀ ਬਚਨ ਤਹਾ ਕੋ ਜਾਤ ਵੀ ਭੌਂਤ ਪਾਸ ਸੁ ਤਾਇ ਤਰਨ ਸਮਝਾਤ ਵੀ ਵਲਡ ਪੀਏ ਇਹ ਭਾਂਤ ਕਹੋ ਸਮਝਾਏ ਕਹਿ ਹੋ ਮਿਲਖੈ ਤੁਮ ਸੋ ਆਜ ਸੋ ਰਾਤੀ ਆਏ ਕਹਿ ਹੋ ਜਦਾਰ ਪਰਨਾਰਵ ਹੈ ਅਟਕਤ ਪਈ ਅਰਧ ਰਾਤਰ ਤੀਰ ਮਿਲਣ ਕੇ ਹਿਤ ਗਈ ਫੂਰ ਪਾਨ ਮਦ ਪਾਨ ਸੇ ਸੁਭ ਕੌਰ ਚਿਓ ਹੋ ਭਜੀ ਸਿਗਰ ਨਿਸ ਤ੍ਰਿਆ ਸੁਰਤੀ ਐਸੀ ਮਚਿਓ ਨਿਸ ਸਿਗਰੀ ਕੋ ਕੇਲ ਤਰਨ ਦ੍ਰੜ ਪਾਇ ਕਹਿ ਬਿਨ ਦਾਮਨ ਕੇ ਦੇ ਰਹੀ ਉਰ ਜਾਏ ਕਹਿ ਵਿਆਸ ਪੀਏ ਮੈਂ ਇਕ ਤ੍ਰਿਤ ਦਿਖਾਏ ਹੋ ਹੋ ਨਿਜ ਨਾਇਕ ਕੋ ਮਾਰਿ ਤਿਹਾਰੇ ਆਏ ਹੋ ਦੂਹੂ ਆਤ ਦ੍ਰਿੜ ਤਰਤ ਪੀ ਜਾਏ ਕੈ ਬਾਏ ਭਈ ਮੁਰਰਾਇਓ ਦਈ ਉਡਾਏ ਕੈ ਮੂਦ ਮੂਦ ਮੁਖ ਰਾਤ ਕਹਾ ਹੂੰ ਹੈ ਹੋ ਦੇਖੋ ਲੋਕ ਸਭਾਏ ਪਿਆ ਮੁਰਮਰਤ ਹੈ ਚੋਬਈ ਜਿਉ ਓ ਚਾਹਤ ਕੇ ਹੈ ਪੁਕਾਰੈ ਮੋਰੀਆਂ ਕੋ ਪ੍ਰਾਨੋ ਉਬਾਰੈ ਕਿਉ ਤ੍ਰਿਏ ਮੂਦ ਮੂਦ ਮੁਖ ਲਈ ਨਿਕਸਨਾ ਸਵਾਸਨ ਬਾਹ ਦੇਈ ਅੜਿਲ ਸਵਾਸਾ ਕੋ ਲੋ ਹੈ ਭੀ ਗ੍ਰਾਮ ਵਾਸੀਆਂ ਆਨ ਤਿਰਿਓ ਆਖ ਨੇ ਹਿਰਿਓ ਜੀਅਤ ਕਜੂਦਰੀਏ ਗਈ ਲਵਟਾਏ ਕੈ ਉਹ ਮਲਦਲ ਚੂਤਣ ਸੋਂ ਪੀਏ ਦਇਓ ਖਪਾਏ ਕੈ ਅਰਧ ਦਪਾਰੀ ਜਿਨ ਕਰ ਪੀਐ ਸੰਘਾਰਿਓ ਗ੍ਰਾਮ ਵਾਸੀਆਂ ਠਾਡੇ ਤ੍ਰਿਤ ਨੇ ਹਾਰਿਓ ਮੂਦ ਮੂਦ ਮੁਖ ਨਾਕ ਹਾ ਹ ਕਹਿ ਕਹਿ ਰਹੀ ਹੋ ਬਾਤ ਰੋਗ ਪਤ ਮਰੇ ਨ ਬੈਦ ਮਿਲਿਓ ਦਈ ਚਉਪਈ ਸਭ ਹਿੰਦ ਦੇਖਿਤ ਪਤ ਕੋ ਮਾਰਿਓ ਗ੍ਰਾਮ ਵਾਸੀਆਂ ਕਛ ਵਿਚਾਰਿਓ ਪਤ ਕੇ ਵਿਯੋਗ ਸਦਨ ਤਜ ਗਈ ਤਾਂ ਕੇ ਰਾਤ ਜਾਏ ਗ੍ਰਹਿ ਭਈ ਇਤ ਸ੍ਰੀ ਚਰਿਤ੍ਰ ਭਗਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 231 ਚਰਿਤ੍ਰ ਸਮਾਪਤ ਮਸਤ ਸੋਭ ਮਸਤੇ ਅਪਜੂ ਦੋਹਰਾ ਇਕ ਰਾਜਾ ਮਲਤਾਨ ਕੋ ਬਿਰਧ ਛਤਰ ਤੇ ਨਾਮ ਬਿਰਧ ਦੇਹ ਤਾਕੋ ਰਹਿ ਜਾਣਤ ਸਿਗਰੋ ਗ੍ਰਾਮ ਚਉਪਈ ਤਾ ਕੇ ਧਾਮ ਪੁੱਤਰ ਨੇ ਰਾਜਾ ਅਦਿਕ ਬਿਰਧ ਵੈ ਗਇਓ ਏਕ ਨਾਰ ਤਬ ਔਰ ਵਿਆਹੀ ਅਦਿਕ ਰੂਪ ਜਾ ਕੇ ਤਨ ਆਹੀ ਸ੍ਰੀ ਬਡਿਆਸ਼ਮਤੀ ਜਗ ਕਹੇ ਜੇ ਲਖ ਮਦਨ ਥਕਤ ਹੋਇ ਰਹੇ ਸੋਹ ਰਾਣੀ ਤਰਨੀ ਜਬ ਭਈ ਮਦਨ ਕੁਮਾਰ ਨਿਰਖ ਕਰ ਗਈ ਤਾ ਦਿਨ ਤੇ ਹਰਿ ਆਰੀ ਬਸ ਭਈ ਗਰੇ ਭੂਲ ਸਕਲ ਸੁਧ ਗਈ ਪਠੈ ਸਾਹਤਰੀ ਤਾਇ ਬੁਲਾਇਓ ਕਾਮ ਭੋਗ ਰੂਜਮਾਨ ਕਮਾਇਓ ੜ ਤਰਨ पुरुष को तरण जदन त्रिय पावी तनकना छोर्यो चात घरे लपटावी निरख मगन होए रात सज्जन के रूप मैं हो जन तन चल्यो हराए जुवारी जूग मैं बिरद छत्र तब लगे पहुंचो आन कर रानी लयो दुराए मित्र हित मानकारी तरै खाट के ਉਹ ਟਾਰਿਆ ਗਏ ਨਿਜ ਪਤ ਕੋ ਇਹ ਵਿਦ ਭਾਖਿਓ ਚਉ ਪਈ ਜਨੀਤ ਰਾਵ ਬਿਰਧ ਤੁਮ ਪਏ ਖਿਲਤਾ ਖੇਟ ਉਤੇ ਰਹਿ ਗਏ ਤੁਮ ਕੋ ਹਾਂ ਜਰਾ ਗਹਿ ਲੀਨੋ ਤਾਂ ਤੇ ਤੂੰ ਸਭ ਕਛ ਤਜ ਦੀਨੋ ਸੂਨ ਮੈਂ ਨਾ ਬਿਰਧ ਵੈ ਗਇਓ ਜਰਾ ਨਾ ਹਾਰ ਵਿਆਪਕ ਭਇਓ ਕਹ ਤੋ ਅਭ ਹੀ ਜਾਉ ਸ਼ਿਕਾਰਾ ਮਾਰਉ ਰੋਜ ਰੀਜ ਚੰਖਾਰਾ ਯਹ ਕਹਿ ਬਚਨ ਅਖੇਟਕ ਗਇਓ ਰਾਣੀ ਟਾਰਜਾਰ ਕਹ ਦਇਓ निसबे खेर अखेटग आयो भेद भेद जड़ कछु न पायो इत श्री चरित्र भख्याने त्रया चरित्रे भूप मंत्री संवादे 232 चरित्र समाप्त मस्त सुब मस्त अबजू दोहरा सार बिच क्षण पूर्वक है सिंह बिच क्षण राए मति भार जाहे बिच क्षण ਸਰਵਰ ਕੂਪ ਜਹਾਂ ਫੁਲਵਾਰੇ ਬਾਇ ਬਿਲਾਸ ਪਲੀ ਹਿਤਕਾਰੀ ਸਰਤਾ ਨਿਕਟ ਨਰਬਦਾ ਬਹਿ ਲਖਾਵੇਂ ਇੰਦਰ ਥਕਤ ਵਹਿ ਰਹੇ ਸੋਈਆ ਬਾਲ ਹੁ ਤੀ ਬ੍ਰਿਗ ਭਾਨ ਕਲਾਇਕ ਰੂਪ ਲਸੈ ਜਿਹ ਕੋ ਜਗ ਭਾਰੀ ਖੇਰ ਅਖੇਟ ਕੇ ਆਵਤ ਹੂੰ ਇਨ ਰਾਏ ਕਹੂੰ ਬੋ ਨਾਰਿ ਨਿਹਾਰੀ ਐਂਜ ਬਰਿਓ ਗਹਿ ਕਹਿ ਬਈਆਂ ਤਿਨ ਬਾਤ ਸੁਣੀ ਇਨ ਰਾਜ ਦੁਲਾਰੀ ਕੋਪ ਪਰਿ ਬਿਨ ਜਰੀ ਮੁਖ ਨਿਆਏ ਰਹੀ ਨਾ ਨਾਰੀ ਚੋਪਈ ਤਾ ਸੋ ਬਿਉ ਨਿਰਭਉ ਜਵ ਕੀਓ ਪਾਨ ਪਾਨ ਤਾ ਕੋ ਰਸ ਲਿਓ ਰਹਿਣ ਦੇ ਸਤ੍ਰੀ ਧਾਮ ਬਿਹਾਰੈ ਔਰ ਰਾਣੀ ਕਉ ਨ ਨਿਹਾਰੈ ਜੋਰਾ ਤਵ ਪੀਤ ਵਰਣ ਤਨ ਕੋ ਪਯੋ ਪਾਨ ਚਬਾਵਤ ਨਾਹੇ ਚੋਪਈ ਰਾਜਾ ਸਹਿਤ ਆਜ ਹੁਨੇ ਡਰਿ ਹੋ ਨਾ ਝਾਂਰ ਜੀ ਦੇਕ ਨ ਟਰਿ ਹੋ ਇਨ ਦੂਹੂ ਮਾਰ ਪੂਤ ਨਿਰਭਉ ਕਹਿ ਹੋ ਪਾਨੀ ਪਾਨ ਤਵੈ ਮੁਖ ਦੇਹੋ ਅੜਿਨ ਦਾਬ ਖਾੜ ਤਰ ਗਈ ਗੁਡਾਂ ਬਣਾਏ ਕੈ ਨਿਜਨਾਥੈ ਭੋਜਨ ਮੈਂ ਮੱਕਰੀ ਖਵਾਏ ਕੈ ਰੀਦ ਰੀਦ ਵਹ ਮਰਿਓ ਤਵੈ ਤ੍ਰਿਯੌ ਕੀਓ ਹੋ ਝਾਰ-ਬਾਰ ਕਰਿ ਨਾਥ ਕਹਾ ਗੈ ਲਿਓ ਇਨ ਰਾਜਾ ਕੇ ਗੁੱਡੀਆਂ ਕੀਆ ਬਣਾਏ ਕੈ ਤਾਤੇ ਮੋਰਪਤਿ ਮਰਿਓ ਅਧਿਕ ਦੁਖ ਪਾਏ ਕੈ ਯਾ ਕੁੱਤਿਆ ਕੀ ਆਭੀ ਕ੍ਰਿਆ ਉਘਾਰਿ ਹੋ ਹੋ ਪ੍ਰਥਮ ਮੂਡ ਕੈ ਮੂਡ ਬਹੁਰ ਇਹ ਮਾਰਿਓ लै प्रजा सब संग तही आवत पई जा खाट तट गाड़ धौ बुडियन गई सबन लहत खन भू लै ते गाड़ हो मूंड शब्द को मूंड नाक पुण बाट कह मूंड मूंड कट नाक बहोत हे मारयो ओ बिद पातिहानी एह छल जा काटा रयो छंचलान के भेद नाहे किनहु लयो हो शास्त्र सिमरत वेद पुराणन में कहयो ਇਤਿ ਸ੍ਰੀ ਚరిత్ర ਪਖਿਆਨੇ ਤ੍ਰਿਆ ਚరిత్రੇ ਭੂਪ ਮੰਤਰੀ ਸੰਵਾਦੇ 233 ਚరిత్ర ਸਮਾਪਤ ਮਸਤ ਸੋਭ ਮਸਤ ਆਪ ਜੀ